ਦੋਹਰਾ ਹਰਾਵੀ ਨਦੀ ਉਪਰ ਬਸੈ ਨਾਰ ਸਾਹਿਬਾ ਨਾਮ ਮਿਰਜਾ ਕੇ ਸੰਗ ਦੋਸਤੀ ਕਰਤਿ ਆਠ ਜਾਮ ਚਉਪਈ ਤਾਕੋ ਦੁਲਹਾ ਬਿਰਾਹਣ ਆਇਓ ਯਹ ਮਿਰਜਾ ਚਿਤ ਚਿੰਤ ਵਡਾਇਓ ਯਾ ਕੋ ਯਤਨ ਕੌਣ ਸੋ ਕੀਜੈ ਯਾ ਤੇ ਯਹ ਅਬਲਾ ਹਰ ਲੀਜੈ ਤ੍ਰੀ ਹੁਕੇ ਜੀਵੈ ਜੋ ਆਈ ਪਿਆਰੋ ਮਿੱਤਰ ਨਾ ਛੋਰੀਓ ਜਾਏ ਯਾਕੋ ਵਿਆਹ ਕਹਾ ਮੈਂ ਕਰਹੋ ਯਾਹੀ ਸੋ ਜਿਓ ਕਹਿ ਮਰਹੋ ਮੀਤ ਭੋਗ ਤੁਮਰੇ ਮੈਂ ਰਸੀ ਪਾਤਰੀ ਭਾਵ ਜਾਨ ਗ੍ਰਹਿ ਬਸੀ ਮੇਰੋ ਚਿਤ ਚੋਰ ਤੈ ਲੀਨੋ ਤਾਤੇ ਜਾਤ ਵਿਆਹ ਨਹਿ ਕੀਨੋ ਦੋਰਾ ਸਾਤ ਕਹਾ ਜੀ ਕੀ ਤੁਮੈ ਸੁਨਹੋ ਮੀਤ ਬਨਾਏ ਮੁਖ ਮੰਗੇ ਵਰ ਦੇਤ ਨਹਿ ਘੋਲ ਕੁਮਾਈ ਮਾਏ ਚਉ ਪਈ ਅਬ मोहि मीत कहो का करो तोहि छाड़वा कह नह बरो मोहि आवाज पृष्ठ पर डारो आपन रह कर संग सिधारो जोरा जब लो हमरे धाम न गए बराती आए तब लो मोहि तें बाज पै जार लि जाए तो जाए सवैया तेरे ही संग विराजौ मीत मैं और करोगी कहा पद कह कह तोहू को आवाज बरो न टरो मर हो ਨੇ ਹੋ ਬੜਾਏ ਸੋ ਕੇਲ ਕਮਾਏ ਸੋ ਦੇਤ ਤਿਨੈ ਆਪਣੀ ਤ੍ਰਿਏ ਕਹਿ ਕੈ ਵੈ ਦਿਨ ਭੂਲ ਗਏ ਤੂੰ ਕੋ ਜੀਉ ਹੋ ਕੈ ਸੋ ਲਾਲਨ ਲਾਜ ਲਜਾਇ ਕੈ ਪੀਰੀ ਹੋਇ ਜਾਤ ਕਨੀ ਪਛਤਾਤ ਵਿਆਹ ਕੀ ਜੋ ਕੋ ਬਾਤ ਸੁਣਾਵੇ ਪਾਣ ਪਾਨ ਮਰੋਰਤ ਮਾਨਨੀ ਦਾੰਤਨ ਸੋਂ ਅੰਗਰੀਨ ਚਬਾਵੇ ਨਾਰ ਨਵਾਏ ਖਨੈ ਪਹੁਮੀ ਨਖ ਰੇਖ ਲਖੈ ਮਨ ਮੈ ਪਛਤਾਵੇ प्यारी कोपीए रूचै मिरजा पर ब्याहो कियो मन मै ना सुहावे इंदोरा रूतिर रम तुमरे रची और सुहात ना मोहे ब्याहे बराती जाय हैं लाज ना एहै तोहे सुइया न सक मोर गए अनत नह जान प्रियतम जीत रहगो प्यारी ही प्यारी पुकारत यारत बीथन मै ਉਹ ਹਮਰੇ ਇਨਕੇ ਦੂ ਬੀਜ ਕਹੋ ਕਿਹ ਭਾਂਤ ਸੁਨੇਹ ਰਹਿ ਗੋ ਕੌਨ ਹੀ ਕਾਜ ਸੋ ਜੀਵੋ ਸਖੀ ਜਬ ਪ੍ਰੀਤ ਬਧਿਓ ਨਿਜ ਮੀਤ ਦਹੈ ਗੋ ਚਉਪੈ ਇਹ ਮਾਨਨੀ ਮੰਤਰ ਵਿਚਾਰਿਓ ਬੋਲ ਸਖੀ ਪ੍ਰਤ ਬਚਨ ਉਚਾਰਿਓ ਮਿਰਜਾ ਸਾਥ ਜਾਏ ਤੁਮ ਆਜ ਆਨ ਸਾਹਿਬਾਂ ਕੋ ਕਹੀਓ ਜਬ ਵਹ ਆਏ ਵਿਆਹ ਕਰਨ ਲੈ ਹੈ ਤੁਮਰੇ ਢਾਰ ਪੂਲ ਸਰਜੈ ਹੈ ਮੂਰੇ ਕਹਿ ਕਹੋ ਕਾ ਕਰਿਓ ਗੁਰਮੈ ਮਾਰ ਕਟਾਰੀ ਮਰ ਹੋ ਦੋਹਰਾ ਜੋ ਹਮਸੇ ਲਾਗੀ ਕਛੂ ਤੁਮਰੀ ਲਗਨ ਬਨਾਏ ਤਉ ਮੋ ਕੋ ਲੈ ਜਾਈਐ ਆਜ ਨਿਸਾ ਕਹ ਆਏ ਅੜਿਲ ਰੰਗਵਤੀਏ ਪੰਜ ਵੈ ਪਾਇਓ ਸਗਲ ਪੁਰਖ ਗੋ ਭੇਸਤ ਆਪ ਬਨਾਇਓ ਵੈ ਵਹਿਕੈ ਬਾਜ ਅਰੂੜ ਤਵੈ ਤਹ ਕੋ ਚਲੀ ਹੋਲੀ ਨੇ ਸਕਲ ਸੁਬੇਸ ਸਕੀ ਬੀਸਕ ਭਲੀ ਚਉਪਈ ਚਲੀ ਸਕੀ ਆਵ ਤਹ ਪਈ ਜਹਾ ਕਛ ਸੁਧ ਮਿਰਜਾ ਕੀ ਲਈ ਸਖੀ ਸਹਿਤ ਚਲ ਸੀਸ ਚੁਕਾਇਓ ਤੋਹ ਸਹਾਈਬਾਂ ਵੀ ਬੁਲਾਇਓ ਮਿਰਜਾ ਸੁਨਤ ਬਾਜ ਚੜਤਾ ਆਇਓ ਪਲਕ ਨਾ ਪਈ ਗਾਵਤਾ ਆਇਓ ਜਐ ਸੁਧ ਜਵੈ ਸਹਾਈਬਾਂ ਪਾਈ ਤੁਰ ਤੇਗਤਾ ਸਖੀ ਪਠਾਈ ਦੁਹਰਾ ਸੁਨੋ ਮਿੱਤਰ ਬਿਨ ਨਿਸਪਈ ਹਿਆ ਨਾ ਪਹੁੰਚੋ ਆਏ ਜਿਲ ਕੋ ਸੋਦ ਪਛਾਨ ਕੋ ਤੈਨ ਪ੍ਰਤ ਕਹਿ ਨਾ ਜਾਏ ਚਉ ਬਈ ਬਹੁਰ ਸਖੀ ਤੇ ਹਾਨ ਜਿਤਾਇਓ ਬੈਠ ਬਾਗ ਮੈਂ ਦਿਵਸ ਬਿਤਾਇਓ ਸੂਰਜ ਛਪਿਓ ਰਹਿਣ ਜਾ ਭਈ ਬਾੜ ਗਾਮ ਤਾਕੇ ਕੀ ਲਈ ਰਹਿਣ ਪਈ ਤਾਕੇ ਤਵ ਗਇਓ ਡਾਰਤ ਬਾਜ ਪ੍ਰਿਸ਼ਟ ਤੇ ਭਇਓ ਹਰ ਤਾਕੋ ਦੇ ਸੌਰ ਸਿਧਾਰਿਓ ਜੋ ਪਹੁੰਚਿਓ ਤਾਕੋ ਸਰ ਮਾਰਿਓ ਰਹਿਣ ਸਕਲ ਕੋ ਲੈ ਗਇਓ ਉਤਰਦ ਚੜੇ ਦਿਵਸ ਕੇ ਭਇਓ ਥੋਸੋ ਕੁਮਾਰ ਅਦਕ ਤਨਹਾਰਿਓ ਔਰ ਸਾਹਿਬਾਂ ਸਾਥ ਵਿਹਾਰਿਓ ਸ਼ਰਮਤ ਭਇਓ ਤਾ ਕਛ ਸਵੈ ਰਹਿਓ ਤਵ ਲੋ ਸਭ ਸਮ ਸੁਣ ਲਇਓ ਚੜੇ ਤੁਰੈ ਸਭ ਸੂਰ ਬਾਂਦੇ ਗੋਲ ਤਹਾਂ ਕਹਤਾਏ ਤਵ ਸਾਹਿਬਾਂ ਦਿਗ ਛੋਰ ਨਿਹਾਰਾ 헤ਰੈ ਚਹੁ ਔਰ ਅਸਵਾਰਾ ਸੰਗ ਭਾਈ ਦੋ ਤਾਏ ਨਿਆਰੇ ਕਰਨ ਬਹਿ ਨੈਣ ਕਜਰਾਰੇ ਜੋ ਹਮਰੋ ਪਦ ਇਨੈ ਨਿਹਰ ਹੈ ਤੂੰ ਬਾਣ ਤੂੰਨ ਕਾ ਹਾਰਿਆ ਤਾ ਤੇ ਕਛੂ ਯਤਨ ਅਬ ਕੀਜੈ ਜਾ ਤੇ ਰਾਹ ਭਾਈ ਅਨਲੀਜੈ ਸੋਵਤ ਹਦੋਂ ਭੀਤ ਨਾ ਜਗਾਇਓ ਜਾਂਡ ਭੈ ਤਰਕ ਸੇ ਸ਼ਸਤਰ ਲੈ ਕਹੂੰ ਦੁਰਾਏ ਖੋਜੇ ਹੁਤੇ ਜਾਤ ਨਹ ਪਾਏ ਤਵ ਆਏ ਸੂਰ ਸਭ ਗਏ ਮਾਰੋ ਮਾਰ ਪੁਕਾਰਤ ਭੈ ਤਬ ਮਿਰਦਾ ਜੁਨੈ ਨੋ ਘਾਰੇ ਕਹਾਂ ਗਏ ਹਥਿਆਰ ਹਮਾਰੇ पौंडी रांड कहो क्या करयो तरकस टांग जांड पै धरयो पहुंचे आन कहां धरए तें शस्त्र हमारे शस्त्र बिना कहो के कहो नारी क्या मंत्र बिचारो साथी को संग में नाही चिंता अद के है चितमाई हेर रहयो आज दिनाए पाए तब लग घेर दवैया आए त्रिको आवाज पृष्ठ पर ढारयो ਨਗਰ ਆਪਣੇ ਔਰ ਸੁਧਾਰਿਓ ਬਿਨ ਆਜਿਦ ਭਜ ਚਲਿਓ ਨਿਹਾਰਿਓ ਨਿਰਪੈ ਵੈ ਸਭ ਹੂੰ ਵਿਚਾਰਿਓ ਇੰਦੂਹਨ ਕੋ ਜਾਣ ਨਾ ਦੈ ਹੈ ਜਾ ਮਾਰ ਆਜ ਜਹੀ ਲੈ ਹੈ ਕੋ ਉਪਕਰ ਸਹਤੀ ਕਾਟ ਕਰ ਖੜਕ ਨਚਾਇਓ ਕਿਨੂ ਮਾਰ ਬਾਨਨ ਕੀ ਕਰੀ ਪਾਗ ਮਿਰਜਾ ਕੀ ਪਰੀ ਪਾਗ ਉਤਰਤਾ ਕੀ ਜਬ ਗਈ ਮੂਢੀ ਹੋਤ ਤੇ ਭਈ ਸੁੰਦਰ ਅਧਕ ਕੇਸ ਤੇ ਛੂਟੇ ਜਬ ਹੀ ਸੂਰਜੁ ਅਦਕਾ ਝੂਟੇ ਕਿਨਿ ਬਿਸਕ ਕਸਤਾਏ ਪ੍ਰਹਾਰਿਓ ਕਿਨੂ ਖੜਕ ਕਾਟ ਤੇ ਮਾਰਿਓ ਕਿਨੂ ਵਾਰ ਗੁਰਜ ਕੋ ਕੀਨੋ ਖੇਤ ਵਾਰ ਮਿਰਜਾ ਕੋ ਲੀਨੋ ਪ੍ਰਥਮਨਾਸ ਮਿਰਜਾ ਧਰਿਓ ਬੈਠੇ ਤੁਸੀਂ ਮਿਰਛ ਕਰਿ ਜਹਾਂ ਤਿਨ ਦੂਹੂਨ ਰਹਿਨ ਬਿਤਾਈ ਦੋਹਰਾ ਕਮਰ ਭਰਾਤ ਕੇ ਕੀ ਤੁਰਤ ਜਮਦਰ ਨਿਕਾਰ ਕਿਉ ਪਿਆਨੋ ਮੀਤ ਪੈ ਉਧਰ ਘਟਾਰੀ ਮਾਰਿ ਚਉ પ્રથમ વીતહતે નિકરાયો બહોર બિરજતરે આન સવાયો પ્રાર્થન મોહ બહોર લખ કિયો શસ્ત્ર તાંગ જાંડ પર દિયો પ્રથમ રૂપ હેર તે બિગસી નિજ પદ કૈતા કૌલે નિકસી પ્રાર્થન હેર મોહ મન આયો નિજ પ્રીતમ કો નાશ કરાયો વાહત્રીય પીર પિયા કે બરી આપો માર કટારી મરી જો ત્રીય ચિત જહ સો બનાવે દેવ દેવ ભીવ નહ પાવે प्रथम ताते कारके पुनि निज मीत अनाय पुनि जम धर उर हन भरी प्राद मोह के पाए भूत पवेख भवारम सोनियत सदा बनाए चतुर चरित्रन कहो सदा अभेव न पायो जाए इत श्री चरित्र बख्याने त्रया चित्रे भूप मंत्री संबादे 129 स्मोज चरित्र समाप्त मस्त शुभ मस्त अपजू ਜੋ ਪਈ ਸਮਤ ਕੁਾਰੇ ਰਾਣੀ ਇੱਕ ਸੁਣੀ ਬੇਦਪੁਰਾਨ ਬਿਖੈ ਆਤਿਗੁਨੀ ਸੇਵਕੀ ਅਤਿ ਕੋ ਉਪਾਸ਼ਕ ਰਹਿ ਹਰ ਹਰ ਸਦਾ ਬਕਤਰ ਤੇ ਕਹੈ ਬਿਸਨ ਸਿਖੈ ਰਾਜਾ ਜੂ ਰਹੀ ਹਰ ਹਰ ਸਦਾ ਬਕਤਰ ਤੇ ਕਹੀ ਸੇਵਕੋ ਨੈਕ ਨ ਮਨ ਮੈਂ ਲਿਆਵੈ ਸਦਾ ਕ੍ਰਿਸ਼ਨ ਕੇ ਗੀਤਨ ਗਾਵੈ ਰਾਣੀ ਸੋਏ ਭਾਂ ਤੋ ਚਾਰੈ ਤੈ ਸਿਵ ਸਿਵ ਕਾਹੇ ਕਉ ਵਿਚਾਰੈ ਚਮਤਕਾਰ ਜਾ ਮੈਂ ਕਛ ਨਾਹੀ ਆਵਤ ਮੋਰੇ ਮਨ चमत्कार शिव तुम्हे बताऊ तो तुमको ए मार्ग ल्याऊ ऐ शिव को कछ त्रित जानो ठान प्रसाद ते पयो दीवानो छपय छंद प्रथम त्रिपुर को काय रुद्र त्रिप्रारि कहायो गंग जटन में धार गंग धार नाम सुहायो जटा जूड़ को धार जटी नाम सध है ਖਾਗ ਮ੍ਰਿਗ ਜਚ ਪੁਜਾਂਗੇ ਅਸੋਰ ਸੁਰ ਨਰ ਮੂਨੀ ਮੋਹ ਹੈ ਕਰੀ ਪਾਰਵਤੀ ਨਾਰ ਪਾਰਵਤੀ ਪਾਰਵਤੀਸ਼ਵਰ ਸਭ ਜਾਣੇ ਕਹਾ ਮੂੜ ਤਹਿਰਾਵ ਭੇਦ ਤਾ ਕੋ ਪਹਿਚਾਨੇ ਦੋਹਰਾ ਚਮਤਕਾਰ ਤੋ ਕੋ ਤੁਰਤ ਪ੍ਰਥਮੈ ਦਿਉ ਦਿਖਾਏ ਬਹੁਰ ਸਿੱਖਿਆ ਸਿਵ ਕੋ ਕਰੋ ਯਾ ਮਾਰਗ ਮੈ ਲਿਆਏ ਚਉਪਈ ਸੋਏ ਗਇਓ ਤਪ ਤੈ ਨਿਆਰਿਓ ਤੁਰਤ ਖਾੜ ਤੇ ਪਗਰ ਪੁਛਾਰਿਓ शिव शिव शिव आपन तव कीनो कछु राव यह भेद न चीनो किन तय काए मोको पटकायो रानी मैं यह कछु न पायो सकल वृथा तुम हमे सुनावो हमरे चित को ताप मिटावो कछु रुद्र तुम वचन उचारे तब ऊपर शिव कुपयो तिहारे चमत्कार यह तमे दिखायो पट खाट दे भू गिरायो सुनत वचन मूर्ख अति डरयो तातरीय ਬਿਸਨ ਜਾਪ ਆਵਤੇ ਮੈਂ त्यागਿਓ ਸਿਵ ਜੂਕੇ ਪਾਇਨ ਸੋ ਲਾਗਿਓ ਚਮਤਕਾਰ ਸਿਵ ਮੋਹਿ ਦਿਖਾਰਿਓ ਆਪਣੇ ਡਾਰਿਓ ਅਬ ਚੇਰੋ ਤਾ ਕੋ ਮੈਂ ਪਇਓ ਬਿਸਨ ਜਾਪ ਤਾਪਤੇ ਤਜ ਦਇਓ ਦੁਹਰਾ ਪਲਕਾਂ ਪਰਤੇ ਰਾਣੀਐ ਸੋਥ ਨਿਰਪਿਤ ਕੋ ਡਾਰ ਸਿਖੈ ਤੁਰਦ ਸਿਵ ਕੋ ਕੀਓ ਇਤ ਸ੍ਰੀ ਚਿਤੁਰਪਖਿਆਨੇ ਤ੍ਰਿਆ ਚੇਤਰੇ ਭੂਪ ਮੰਤਰੀ ਸੰਵਾਦੇ 130 चित्रित समाप्त मस्त शुभ मस्त अपजू चौपी पर्वतेस राजा एक पारो चंद्र वंश चंद्रोति जारो भागमती ताकी बनारी चंद्र ली जा ते विजारी धोरा सुना ता को वडो रही फाराए सा स्वर्ग सो जानियो तोलर लिख्यो न जाए चौपी देवी दात्रानी निहार्यो जनक रूप की रास बिचार्यो ਠਹਿ ਸਾਹਤਰੀ ਬੋਲ ਸੋ ਦੀਨੂ ਕਾਮ ਖੇਲਤਾ ਸੋ ਅਤ ਕੀਨੋ ਦੇਵ ਰਾਜਾ ਸੁਨ ਪਾਵਾ ਕੂ ਜਾਰ ਹਮਾਰੇ ਆਵਾ ਅਤਕ ਕੋਪ ਨਿਰਭ ਖੜ ਗੋਚਾਇਓ ਪਲਕ ਬੀਤੀ ਲੀਨੋ ਤਾਹੇ ਚੜਾਏ ਮਹਾਲ ਪਰ ਦੀਨੂ ਟਾਰਿਆ ਗਏ ਨਿਜ ਪਤ ਕਉ ਬਹੁਤ ਪ੍ਰਕਾਰ ਸਮਾਗਮ ਕੀਓ ਦੋਹਰਾ ਸੋ ਸੋਸਾਰੋ ਸਦਨ ਏਕ ਤੁਰਤ ਪਰ ਲੀਨ ਆਜ ਚੋਰ ਇਕ ਮੈਂ ਗਇਓ ਜੋ ਨਿਰਭਉ ਕਹਿ ਦੀਨ ਚਉਪਈ ਕਹੋ ਤੋ ਤੂੰ ਤਾ ਕਉ ਗਹਿ ਲਿਆਉ ਆਣ ਰਾਵ ਜੂਤ ਮੈਂ ਦਿਖਾਉ ਜੋ ਮੋਹਿ ਕਹੋ ਤਾਹੇ ਸੋ ਕੀਜੈ ਢਾਰ ਮਾਲ ਉਪਰ ਤੇ ਦੀਜੈ ਪ੍ਰਥਮ ਨਿਰਪੈ ਇਹ ਪਾਉਂ ਜਿਤਾਈ ਬਹੁ ਰਉ ਪਾਉਂ ਜਾਰ ਕਉ ਲਿਆਈ ਆਪ ਭੋਗ ਜਿਹ ਸਾਥ ਕਮਾਇਓ ਬਹੁ ਰਾਵ ਕਉ ਆਣ ਦਿਖਾਇਓ રાણી હે તાહે રિસ પરે ਕੋ ਆਗਿਆ આગ્યા યો કરી ઢોલરતે યાકો તુમ ઢારો ਰਾਜਾ ਕੋ કો ના નિહારો વે સખિયા તાકો લે ગઈ ચીંત સદન સો આગે ભઈ સકલ રાવ કો શોગ નિવાર્યો રૂહી પૈ તાકો ગહ ડાર્યો રાજા લખી દુષ્ટ એ કહાયો તિન તન તનક ખેદ નહ પાયો ઉઠ તાતે નિજ धाम સિધાર્યો એ ચિત્ર નિજ જાર લંગાયો कोण राजे ए पांतो चारयो ए जो चोर ठानते डारयो मुहे हार वो मृतक दिखैया आज्ञा मोहे मान यह लईया जो नर हया ते बगाई टू टू कुवै कहे जाई तिल तिल भयो दृष्ट न आवै ताको कौन खोज कर ल्यावै तिल तिल पाए अंग ते पय गीत काक पख गए ताको अंग दृष्ट न आवै कौन भी हो ताको ल पुजंग छंद ਦਿਓ ਡਾਰ ਜਾ ਕੋ ਮਹਾਰਾਜ ਐਸੇ ਲਹਿੋ ਜਾਏ ਤਾਕੋ ਕਛੂ ਅੰਗ ਕੈਸੇ ਕਈ ਟੂਕ ਵੈ ਕੈ ਪਰਿਉ ਕਉਂ ਜਾਈ ਗਏ ਗੀ ਦਿਓ ਕਾਗ ਤਾਕੋ ਜਬਾਈ ਚੋਪੀ ਯੋ ਸੁਨ ਮੂਨ ਨਿਪਤ ਮੁਖ ਤਰੀਂ ਦ੍ਰਿਸ਼ਟ ਰਾਜ ਕਾਰਜ ਪਰ ਕਰੀ ਰਾਣੇ ਆਪਣੋ ਮੀਤ ਬਚਾਇਓ ਵਾਪਸ ਕਉ ਜੋ ਚਰਿਤਰ ਦਿਖਾਇਓ ਇਤਿ ਸ੍ਰੀ ਚਿਤ੍ਰਪਖਿਆਨੇ ਤ੍ਰਿਆਚ੍ਰਿਤਰੇ ਭੂਮੰਤਰੀ ਸੰਵਾਦੇ 131 ਚਿਤ੍ਰਤਰ ਸਮਾਪਤ ਮਸਤ ਸੋਭ ਮਸਤ ਅਪਜੂ